शलोक महल्ला तीज़ा दरवेशी को जानसी विरला को दरवेश जे घर हंडा मांगदा त्रिग जीवन त्रिग वेश को जानसी विरला को दरवेश दरवेशी नु कोई विरला दरवेश जानदा ना हो प्रज्ञान दी गद ब्रह्म ज्ञान दी जाने शब्द दी बिजोड़ सत ਹਰ ਕਿਸੇ ਨੂੰ ਨਹੀਂ ਪਛਾਣ ਦਿੰਦੀ ਗੁਰਨਾਮ ਤੋਂ ਦੀ ਪਛਾਣ ਹੋਈ ਨਹੀਂ ਸੁਖਸਾਦ ਨੂੰ ਯਾ ਭੋਗਰਾ ਫੇਰ ਨਾ ਘਰ ਘਰ ਕੌਲੇ ਲੈ ਕੇ ਮੇਰੇ ਵੀ ਫੱਦੈ ਨਹੀਂ ਅੰਰੇ ਨੂੰ ਵੀ ਫੱਦੈ ਨਹੀਂ ਸਾਡੇ ਅੱਛਾ ਜੀ ਕਰਨਾ ਮੰਗਦੇ ਫਿਰਦੇ ਨੇ ਚਾਹੇ ਕਿਸੇ ਕੰਮ ਖਤਰ ਵੀ ਮੰਗਦੇ ਨੇ ਬਹਾਨਾ ਕੋਈ ਵੀ ਹੈ ਚਾਹੇ ਨਾ ਦਾ ਜੇ ਹਜੂਰ ਸਾਹਿਬ ਨੱਦਰ ਵਾਸਤੇ ਦੁਬੇ ਨੇ ਉਹ ਦਰਵੇਸ਼ ਨੇ ਉਹ ਅਪਰਾਧੀ ਨੇ ਸਾਰੇ ਦਰਵੇਤੀ ਨਹੀਂ ਹੁੰਨ ਕੋਈ ਵੀ ਕੋਈ ਵੀ ਗੁਰ ਸਿੱਖ ਨਹੀਂ ਹੋਣਾ ਚਾਹੇ ਗੁਰ ਸਿੱਖ ਹੀ ਆਜਾਤ ਨਹੀਂ ਦਿੰਦੀ ਤੁੰਗਣਾ ਦਵਾ ਗੁਰਮਤ ਬਹੁਤ ਹੀ ਸਖਤਲੀ ਖਲਾਫ ਹੈ ਇੱਕ ਕਿਸਮ ਵੀ ਜਿਹੜੀ ਹੈ ਜੈਨਵਾਦ ਵਿੱਚ ਗਿਆਨ ਵਿੱਚ ਪੈਸੇ ਦੀ ਕੋਈ ਰੋਲ ਨਹੀਂ ਬਸ तकरीबन ਸਾਜ ਕੋਲ ਜਾਂ ਕਾਡਮੀ ਸਾਬਤ ਕਰ ਦਿੱਤਾ ਕੋਈ ਰੋਲ ਹੈਗੀ ਜਿਹੜਾ ਜ਼ਿੰਦਗੀਆਂ ਸਭ ਦੀਆਂ ਕੀ ਖਾ ਕੇ ਦੀ ਸਾਡਾ ਰੋਟੀ ਖਾ ਲੰਨੇ ਆ ਧੁੱਪੀ ਵਿੱਚ ਹਿਆ ਰੁਕੀ ਉਹ ਮਰਚਾ ਮਿਲ ਜਾਣਾ ਵਰਤੀ ਖਾ ਲਈ ਦੀ ਨੂੰ ਖਾ ਲਈਦਾ ਵੀਰ ਨਾਲ ਤਾਂ ਫੇਰ ਚੰਗੀ ਖਾਂਦੇ ਤਾਂ ਜੋਗੀ ਬੂਸੀਗਾ ਨਹੀਂ ਖਾ ਲਈ ਕੋਈ ਪੈਸੇ ਦੀ ਲੋੜ ਨਹੀਂ ਪੈਸਾ ਪਰਪੰਚ ਆ ਪਰਪੰਚੀ ਲੋਕਾਂ ਨੂੰ ਪੈਸੇ ਦੀ ਲੋੜ ਆ ਪਰਪੰਚ ਰਹਿ ਇਹ ਸਾਡੇ ਮਾਰਗ ਨੂੰ ਉਸੇ ਪਾਉਣ ਵਾਸਤੇ ਉਹਨਾਂ ਸਰਗਮ ਜੀਵਨਾਂ ਤੇ ਉਹਦਾ ਵੇਸ ਬਣਾਇਆ ਹੋਇਆ ਭੇਗ ਪਾਇਆ ਜਿਹੜਾ ਉਹ ਿਰਗਾ ਦਾ ਤਕਾਰ ਆਉਂਦੇ ਪੈਸੂ ਕਰਦੀ ਐ ਸੁਣ ਲੈ ਸੁਣ ਲੈ ਨਹੀਂ ਸੁਣਨਾ ਨਾ ਸੁਣ ਬਹੁਤ ਸੁਣਨਾ ਠੀਕ ਹੈ ਜੀ ਜੇ ਆਸਾ ਅੰਦੇਸਾ ਤਜ ਰਹਿ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਐ ਨਾਨਕ ਹਉ ਬਲਹਾਰੇ ਜਾਉ ਇਹ ਆਸ ਤੇ ਪੂਰੀ ਹੋਊ ਕਿ ਨਹੀਂ ਹੋਊ ਛੱਡੇ ਦੇਵੇ ਦਫਾ ਕਰੇ ਉਹ ਹੋਊ ਨਹੀਂ ਹੋਊ ਹੋ ਆਸ ਤੇ ਦੇ ਨਾਲ ਦੇਸ਼ਾ ਜੁੜਿਆ ਹੋਇਆ ਸਾਡੀ ਨੂੰ ਕਿਉਂਕਿ ਅਸੀਂ ਆਸ ਧਾਰਦੇ ਆ ਉਹਦੇ ਨਾਲ ਸ਼ੰਕਾ ਜੁੜੀ ਹੋਈ ਹੈ ਦੁਆਵਾਂ ਵਿੱਚ ਛੱਡ ਦੇਵੇ ਕੰਮ ਸਵੇਚ ਨੂੰ ਜਿਹਨੂੰ ਨਹੀਂ ਜਿਹਨੂੰ ਨਾਝੜੂ ਜੇ ਨਹੀਂ ਜਾਣਾ ਚੜਨਾ ਨਹੀਂ ਜੇ ਚੜਨਾ ਹਟਣਾ ਨਹੀਂ ਜੇ ਉਹ ਨਾਲ ਹੈ 5 ਸਾਲ ਦੇ ਸਤਜ ਰਹੇ ਹਾਂਜੀ ਗੁਰਮੁਖੀ ਪਿਛਿਆਂ ਨੂੰ ਇਕਾਦੀ ਮੰਗੇ ਨਾਮ ਦੀ ਨਾਨਕ ਬਾਬਾ ਦੇ ਨਾਮ ਦਾ ਸਾਰੀ ਆਸੇ ਰਵੇਸ਼ਾਂ ਪਾਸੇ ਨਾ ਠੀਕ ਹੈ ਜੀ ਸਤਬੀਜ ਫੇਰ ਵੀ ਖੋਦਾ ਕਸ਼ਬੀਜ ਤੇ ਨਾਨਕ ਬਾਬਾ ਦੇ ਕਿਰਪਾ ਕਰੋ ਫਰੇ ਸਤਕੇ ਚਰਨ ਬਖਾਲੀਏ ਨਾਮ ਕੋ ਹਾਂ ਬਲੇ ਉਹ ਆਦਮੀ ਨੇ ਫਿਰ ਚੱਲਣਾ ਧੋਈਏ ਪਖਾਲੀਏ ਪਖਾਲੀਏ ਲਿਖਿਆ ਹੋਇਆ ਹੈ ਹਾਂਜੀ ਇਸਕੇ ਚੱਲ ਪਖਾਲੀਏ ਉਹ ਆਦਮੀ ਸਰਵਿਸ ਰੇਸਟ ਪਖਾਲੀਏ ਦਾ ਮਤਲਬ ਹੋ ਗਿਆ ਪੀੜੇ ਦੀ ਹੈਗਾ ਅੱਛਾ ਲੱਗ ਜੇ ਚੱਲਣਾ ਪਖਾਲੀਏ ਜਿਵੇਂ ਆਪਾਂ ਅੱਗੇ ਆ ਕੇ ਕਰਦੇ ਸਏ ਕੋਈ ਆ ਗਿਆ ਉਹਦੇ ਪੈਰ ਤੋਂ ਹੱਥੇ ਹੋਇਆ ਆਇਆ ਧੂੜ ਤੋਂ ਆਇਆ ਪੈਦਲ ਆਇਆ ਉਹਦਾ ਆਦਰ ਬਾਸੇ ਆਦਰ ਕਰਦੇ ਸਾਂ ਠੀਕ ਹੈ ਜੀ ਉਹ ਉਹ ਆਦਰ ਉਹ ਠੀਕ ਹੈ ਨਾਨਕ ਤਰਵਰ ਏਕ ਫਲ ਦੂਹੀ ਪਖੇਰੂ ਆਹੇ ਆਵਤ ਜਾਤਰਾ diss ਨਾ ਪਰ ਪੰਖੀ ਤਾਹੇ ਨਾਨਕ ਤਰਵਰ ਏਕ ਫਲ ਇੱਕੋ ਤਰਵਰ ਦਾ ਫਲ ਵੀ ਇੱਕੋ ਹੀ ਹੈ ਕੋਈ ਆਹੇ ਪੰਛੀ ਦੋ ਰਹਿਦੇ ਵਰਦੇ ਪੰਛੀ ਦੋ ਨੇ ਸਰਵਰ ਇੱਕ ਦਾ ਫਲ ਵੀ ਇੱਕ ਦਾ ਅੱਛਾ ਜੀ ਉਹ ਇੱਕ ਦਾ ਫਲ ਤਾਂ ਸਰਵਰ ਨੂੰ ਲੱਗਦਾ ਇੱਕ ਦਾ ਇੱਕ ਦਾ ਸਰਵਰ ਨੂੰ ਲੱਗਦਾ ਹੀ ਜਿਹੜਾ ਸਰੀਰ ਰੂਪੀ ਤਰਵਨ ਹੈ ਹਾਂ ਜੀ ਉਹਦੇ ਗਾਣਿਆਂ ਵਾਲੇ ਲੱਗਦਾ ਹੀ ਨਹੀਂ ਉਹਦਾ ਥੱਲੇ ਧਰਤੀ 'ਚ ਪੈਦਾ ਹੁੰਦਾ ਜਿਹੜੀਆਂ ਮੂੜੀਆਂ ਕਰ ਜਾਂਦੇ ਗਾਣੇ ਤਾਂ ਸਾਡੇ ਪੱਟਾ 'ਚ ਪੈਦਾ ਹੁੰਦੀਆਂ ਨੇ ਪਤਾ ਸਹੀ ਬੈਠਾ ਹੋ ਗਿਆ ਠੀਕ ਹੈ ਜੀ ਮੈਂ ਨਾਲੇ ਸੱਤ ਬੈਠਾ ਹੁੰਦੀ ਆ ਨਾ ਪਰ ਜੀਤ ਤਾਂ ਬੈਠਾ ਦਰਖਤ ਨਹੀਂ ਲੱਗਨੇ ਹੋਪਾ ਸਰਵਰ ਉਹ ਸਰਵਰ ਹਲਾਕ ਨੇ ਸਹੀ ਥਾਂ ਹਲਾਕ ਨੇ ਦਾਮ ਹਲਾਕ ਨੇ ਦੁੱਧ ਹਲਾਕ ਹੈ ਮਾਇਆ ਦੀ ਗੁਨਾਹ ਬੋਲਣਾ ਇਹਦੇ ਤੋਂ ਫਲ ਕੀ ਹੈ ਇਹ ਤੇ ਅੱਛਾ ਜੀ ਇਹ ਅੰਮ੍ਰਿਤ ਬਾੜੀ ਹੈ ਇਹਦੇ ਨਾਂ ਨਾਮ ਹੈ ਜਹੀ ਵੇਸ ਹੈ ਮੈਂ ਘੇਰੂ ਨੂੰ ਇਹ ਕੰਮ ਦੱਸ ਦਊਗਾ ਚਾਹੀਦਾ ਫਲ ਫਸਲੂਰ ਦਾ ਖਾਣੇ ਤੇ ਬਾਹਲੇ શરીਰ ਉਹਦਾ ਬਾਹਰੋਂ ਮਣੀਆਂ ਕਾ ਜਰਾ ਮੋਣੀਆਂ ਬਿਜਾਰ ਕੇ ਮਰਦੀਆਂ ਨੇ ਬਿਜਾਰ ਰੋਜ ਲੱਗਦੇ ਤੇ ਰਾਮ ਦਾ ਭੜੇ ਵੀ ਆ ਡਟਾ ਉਹਦਾ ਰਾਮੀ ਖਰਾਬ ਦੋ ਹਾਂ ਕੀ ਉਹ ਦੂਈ ਦੀ ਖਰਾਬ ਵੀ ਉਹ ਸਰੀਰ ਦੀ ਉਹ ਖਰਾਬ ਗੈਸ ਉਹ ਨੇ ਆਪਣੀ ਖਰਾਬ ਮੰਨ ਉਹ ਗੇਰੂ ਦੁਹਾਗੀਓ ਕਰਾ ਨਾ ਮੈਂ ਉਹ ਇਸੇ ਸਰੀਰ ਚੋਂ ਨਹੀਂ ਆਇਆ ਵੀ ਕੋਈ ਦੁਹਾਦਾ ਉਹ ਜਿਹੜਾ ਮੰਨਿਆ ਹੋਇਆ ਨਾ ਸਰੀਰ ਦੀ ਖਰਾਬ ਤਾਂ ਬੰਨਨੇ ਵੀ ਬੇਰੀ ਖਰਾਬ ਗਲਤੀ ਹੈ ਇੱਥੇ ਗਲਤੀ ਹੋਈ ਹੋਈ ਹੈ ਅੱਛਾ ਜੀ ਉਹ ਗੇਰੂ ਨੋੜੇ ਇਹ ਤਾਂ ਹੱਥ ਪੈਰ ਕਰਕੇ ਕੰਦੂ ਕਰਕੇ ਕੁਝ ਖਰਾਬ ਕਹਿਣਾ ਕਰਦਾ ਹੱਥ ਪੈਰ ਕਰ ਕੰਦੂ ਸਭ ਚੀਤ ਰੰਜ ਨਾਲ ਇਕ ਤਾਂ ਕੀਤਾ ਨਾਂਜਲ ਨਾਲ ਲਾਗੇ ਉਹ ਖਰਾਬ ਪੈਦਾ ਕਰਦਾ ਗਾਉਂ ਦੀ ਇਨਕਾ ਹੱਥ ਤਿਆਰ ਕਰਕੇ ਬਾਹਰ ਕਮਾਈ ਕਰਕੇ ਸਰੀਰ ਦੀ ਖਰਾਬ ਪੈਦਾ ਕਰਦਾ ਕਰਦੇ ਦੋਏ ਖਰਾਬ ਨੇ ਦੀ ਲੋੜ ਠੀਕ ਹੈ ਜੀ ਨਾਨਕ ਤਰਵਰ ਏਕ ਫਲ ਦੋਏ ਆਹੇ ਆਵਤ ਜਾਵਤ ਨਾ ਦੀਸਈ ਨਾ ਪਰ ਪੰਖੀ ਤਾਹੇ ਦੇਖੋ ਇਹਨੂੰ ਵੀ ਕੰਕੜਾ ਫੜ ਲੂ ਵੀ ਉਕੜਾ ਫੜ ਵੀ ਪਈ ਐ ਕਰਬਰ ਵੀ ਕੁਝ ਪੰਖੇਰੂ ਲੋਜ ਰੂਦ ਠੀਕ ਹਾਏ ਆਪਦੇ ਜਾਂ ਤਾਂ ਨਾ ਦੇਸੀ ਆਉਂਦੇ ਜਾਂਦੇ ਪਰ ਪੰਖੇਰੂ ਦੋਏ ਇਹ ਜੋ ਪੰਖੇਰੂ ਜਾਂਦੇ ਨੇ ਉੜਦੇ ਆ ਇੱਕ ਹੰਸ ਐ ਪਤਾ ਨਹੀਂ ਲੱਗਦਾ ਕਦੋਂ ਉੱਡ ਕੇ ਕਿੰਦੂ ਨਹੀਂ ਜਾਂਦੇ ਰਹੀਦੇ ਦੀਦੇ ਜਾਂਦੇ ਨਹੀਂ ਆਵਦ ਜਾ ਜੇ ਬਿਨਾ ਪਰਾਂ ਤੋਂ ਪੰਖੀ ਆ ਉਹ ਵਾ ਪਰ ਤਾਂ ਹੈ ਜੇ ਉਹ ਨਾ ਉੱਡਲੇ ਜਾ ਸਕਦਾ ਖੰਭ ਹੈ ਜੀ ਅੱਛਾ ਜੀ ਦੇ ਲਾਗੜੀ ਖੰਭ ਨੇ ਉਹਨਾਂ ਦੇ ਲਾਗੜੀ ਜਾਦਰ ਨਾਲ ਨਿਆਖਾਰੀ ਹੋ ਸਕਦਾ ਬਾਹਰ ਜੇ ਹੋ ਸਕਦੇ ਨੇ ਕਾਲ ਮੇਰਾ ਕਾਰੀ ਹੋ ਸਕਦੇ ਜੀ ਨਾਂ ਇਹ ਮੇਰਾ ਕਾਦੀ ਹੋ ਸਕਦੇ ਜੀ ਤੇ ਖਾਬੂ ਕਿਉਂ ਨਹੀਂ ਹੋ ਸਕਦੇ ਜੀ ਫਾਰੀਕ ਠੀਕ ਅੱਗ ਜੇ ਨਹੀਂ ਨਾ ਰਾਇਸ ਪੰਖੀ ਕਦਾ ਬਣਦਾ ਜੀ ਨਾ ਪਰ ਪੰਖੀ ਤਾਂ ਹੈ ਅੱਬਾ ਵਾਲੇ ਨੇ ਹੋ ਨਾ ਪਰ ਪੰਖੀ ਤਾਂ ਹੈ ਪਰਵਾਜ਼ਾ ਨਾ ਪਖਿਓ ਹੈ ਇਹਦੇ ਉਹਨਾਂ ਨੂੰ ਪਖਿਓ ਦੇ अच्छा उड़ਦੇ ਜਾਂਦੇ ਆਉਂਦੇ ਵੀਦੇ ਦੀ ਭਗਦੇ ਪਰ ਕਹਿੰਦੇ ਉਹਨਾਂ ਨੂੰ ਪੰਖੀ ਹੋਰੇ ਠੀਕ ਨਾਂ ਦਾ ਨਗਰ ਬਨਾਬ ਜੀ ਬਣਾਉਂਦਾ ਠੀਕ ਹੈ اچھا ਇਹਦਾ ਜੇਗਾ ਜੀ ਆਵਜਾਤ ਨਾਲ ਹਰ ਜਪੁ ਕੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਬਹੁ ਰੰਗੀ ਰਸ ਭੋਗਿਆ ਬਹੁ ਰੰਗੀ ਰਸ ਭੋਗਿਆ ਜੀ ਬਹੁ ਰੰਗੀ ਰਸ ਭੋਗਿਆ ਬਾਕੀ ਗਿਆਨ ਵੀ ਬਹੁ ਰੰਗੀ ਰਸ ਭੋਗਿਆ ਬਹੁਤ ਸਾਰੇ ਗ੍ਰੰਥ ਸੁਨੇ ਕ੍ਰੋਮਦਾ ਜੀ ਨੂੰ ਬਹੁਤ ਗ੍ਰੰਥ ਸੁਣੇ ਜਰਵਾਣ ਨਹੀਂ ਹੋ ਸਕਦਾ ਨਿਰਵਾਣ ਜੀ ਤभी ਹੋ ਸਕਦਾ ਭਗਾਇ ਜੇ ਸ਼ਬਦ ਹੈ ਉਦੇਸ਼ ਹੈ ਜਰਵਾਣ ਹੋਰ ਨਿਰਵਾਣ ਸੰਗ ਬੋਧੀ ਬੰਦ ਕਰ ਦਿੰਦਾ ਹੋਰ ਬੋਚ ਪਹੁੰਚ ਜਾਂਦਾ ਨਿਰਵਾਣ ਤਾਂ ਕਹਿਣਾ ਨੇ ਏਡੀ ਜਿਹੜੀ ਬੋਲਣ ਦੀ ਆਸ ਤਾਂ ਨਾ ਬਾਹਣ ਹੈ ਤੇ ਬੋਲਣ ਵੀ ਬੰਦ ਕਰ ਦਿੰਦਾ ਹੈ ਮੇਰਾ ਬੋਲਣ ਦੇ ਵਿੱਚ ਹੀ ਸਾਰਾ ਫਸਦਾ ਆਪਣਾ ਕਦੇ ਨਹੀਂ ਫਸਦੇ ਆਪ ਬਚਦੀ ਆਪਣੇ ਬਚਨਾਂ ਨਾਲ ਬੰਨ੍ਹਉਂਦਾ ਜੇ ਕਹਿੰਦਾ ਮੈਂ ਕੋਡੂਕਾ ਦਾ ਕਾਫਸ ਗਿਆ ਜੇ ਕਹਿੰਦਾ ਪਾਪ ਕਰਦਾ ਕਾਫਸ ਗਿਆ ਬੰਦ ਕਰ ਠੀਕ ਹੈ ਜੀ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਜਿਹੜੇ ਹਰ ਰਸ ਰੂਪੀ ਫਲ ਦੇ ਨਾਲ ਰਾਜੇ ਜਿਹੜਾ ਉਹ ਖਾਣ ਲੱਗ ਗਏ ਹੋਰ ਉਹਨੂੰ ਛੱਡ ਕੇ ਹੋਰ ਫੜ ਕੋਈ ਖਾਦ ਨਹੀਂ ਦੀ ਕਾਹ ਗੋ ਸੱਚਾ ਦੀ ਸ਼ਾਨ ਆਸਾਂ ਵਿੱਚ ਉਹਨਾਂ ਦੇ ਦਰਗਾਹ ਦੀ ਪੂਰੀ ਦਰਪਨ ਉਹਨਾਂ ਦੇ ਅੰਦਰ ਸ਼ਬਦ ਵੀ ਪ੍ਰਗਟਾਣ ਨਹੀਂ ਸੋਣ ਨਿਸ਼ਾਨ ਉਹਨਾਂ ਨੇ ਆਵਾਜ਼ ਕਰਦੀ ਆ ਉਹਨਾਂ ਲਈ ਆ ਜਾਏ ਗੁਰਬਾਨੀ ਪਰਮ ਸੱਚਾ ਦੀ ਠੀਕ ਹੈ ਜੀ ਅੱਜ ਜੀ ਇਹ ਜਿਹੜਾ ਪਹਿਲਾ ਆਪਾਂ ਕਰਕੇ ਹਟੇ ਨਾ ਨਾਨਕ ਤਰਵਰ ਏਕ ਫਲ ਦੋ ਪਖੇਰੂ ਆਹੇ ਆਵਤ ਜਾਤ ਨਾ ਦੀਸੈ ਨਾਮ ਪਰ ਪੰਖੀ ਤਾਂ ਹੈ ਇਹ ਪਿਆ ਹੋਏ ਇਹਨਾਂ ਨੂੰ ਇੱਥੇ ਜਿੰਨੇ ਵੀ ਅਰਥ ਹੋਏ ਆ ਹੁਣ ਤੱਕ ਉਹ ਅਰਥ ਇਸ ਤਰ੍ਹਾਂ ਕਰਦੇ ਆ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਸਰੀਰ ਇੱਕ ਰੁੱਖ ਹੈ ਇਸ ਨੂੰ ਇੱਕ ਫਲ ਲੱਗਿਆ ਹੋਇਆ ਹੈ ਅਤੇ ਇਸ ਰੁੱਖ 'ਤੇ ਦੋ ਪੰਛੀ ਬੈਠੇ ਹੋਏ ਹਨ ਕੀ ਆਉਂਦੇ ਜਾਂਦੇ ਦਿਸਤੇ ਨਹੀਂ ਹਨ ਅਤੇ ਨਾਂ ਉਹਨਾਂ ਪੰਛੀਆਂ ਨੂੰ ਖੰਭ ਲੱਗੇ ਹੋਏ ਹਨ। ਆਖਿਆ ਤੇ ਇੱਕ ਦਾ ਅਰਥ ਇਹ ਹੈ ਜੀ ਉਹਨੇ ਖਾਂਦੇ ਕੀ ਫਿਰ ਅੱਦੇ ਬੈ ਕੇ ਕਾਹਨੋਂ ਉਹਦੇ ਭੁੱਖੇ ਮਨ ਤੇ ਉਹਨੇ ਕੋ ਗੁੜ ਕੇ ਆਉਂਦੇ ਗੱਲ ਨਹੀਂ ਸਮਝ ਆ ਰਹੀ ਗੱਲ ਹੋਈ ਕੀ ਹੈ। ਜੀ ਹੋਰ ਅਰਥ ਮੈਂ ਪੜਦਾ ਜੀ। ਹਾਂ ਨਾਨਕ ਸਰੀਰ ਮਾਨੋ ਇੱਕ ਬ੍ਰਿਛ ਹੈ ਦੋ ਇਸਤੇ ਪੰਛੀ ਬੈਠੇ ਹਨ ਇੱਕ ਜੀਵਾਤਮਾ ਤੇ ਦੂਸਰਾ ਹੈ ਪਰਮਾਤਮਾ ਪਰਮਾਤਮਾ ਨੇ ਪਾ ਜੀ ਬੁਲਾਤਾ ਆ ਬੰ ਮਨਦੇ ਉੱਤੇ ਬੈਠਾ ਹੋ ਗਿਆ ਕੀ ਗੱਲ ਕਰਦੀ ਐ ਇਹਨਾਂ ਤੁਸੀਂ ਇਹਨਾਂ ਦੇ ਪੱਲੇ ਕੁਛ ਹੈ ਕਿ ਤੂੰ ਇੱਕ ਜੀਵਾਤਮਾ ਦੱਸਦੇ ਆ ਜੀ ਜੀਵਾਤਮਾ ਔਰ ਪਰਮਾਤਮਾ ਚ ਕੀ ਫਰਕ ਹੁੰਦਾ ਜੀਵਾਤਮਾ ਦੋ ਹਿੱਸਿਆਂ ਇੱਕ ਹੋ ਜਾਂਦੀ ਹੈ ਪਰਮਾਤਮਾ ਹੈ ਇੱਕ ਹੋਏ ਤੇ ਪਰਮਾਤਮਾ ਹੋਈ ਨਹੀਂ ਜਿਨੀ ਆਤਮ ਜਾਣਿਆ ਪਰਮਾਤਮਾ ਤੋਂ ਇਹਨਾਂ ਨੇ ਪਰਮਾਤਮਾ ਪਹਿਲੇ ਪੰਛੀ ਬਣਾ ਕੇ ਉੱਤੇ ਬਿਠਾ ਲਤਾ ਕੀ ਹੋਣਾ ਇਹਨਾਂ ਨੂੰ ਕਹੀਏ ਇਹਨਾਂ ਨੇ ਅਸਲ ਕਿੱਥੋਂ ਲਈ ਹੈ ਆਲਾ ਨਾ ਕਿੱਥੋਂ ਪੈਦਾ ਹੋਈ ਹੈ ਕਿਹੜੀ ਪੌੜੀ ਹੈ ਕਿਹੜਾ ਸ਼ਬਦ ਹੈ ਕਿਹੜਾ ਰਾਗ ਹੈ ਕਿਹੜੀ ਭਾਵੇਂ ਕਿੱਥੋਂ ਤਾਂ ਇਹਨਾਂ ਕੋਲ ਆਈਏ ਦੱਸਣ ਇਹ ਦੱਸਣ ਹੋਇਆ ਵਾਰ ਕੀ ਦੱਸਣ ਇਹ ਦੋਏ ਪੰਛੀ ਆਉਂਦੇ ਜਾਂਦੇ ਦਿਸਦੇ ਨਹੀਂ ਨਾ ਇਹ ਨਾ ਪੰਛੀਆਂ ਦੇ ਖੰਭ ਦਿਸਦੇ ਹਨ ਫਿਰ ਪ੍ਰੋਫੈਸਰ ਕਿਸਮ ਦੇ ਗੁਰਮੁਖ ਤੇ ਮਨਮੁਖ ਪੰਛੀ ਹਨ ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿਸਦੇ ਨਹੀਂ ਉਹ ਗੱਲ ਕੁਝ ਵੀ ਨਹੀਂ ਬਣੀ ਫਿਰ ਇਹ ਨਿਰਣਾ ਕਰਦੇ ਆਂ ਜੀ ਗੁਰਬਾਣੀ ਵਿੱਚ ਸੰਸਾਰ ਤੇ ਕਾਇਆ ਦੋਹਾਂ ਨੂੰ ਰੁਖ ਤੇ ਰੂਪਕ ਵਿੱਚ ਵਰਤਿਆ ਗਿਆ ਹੈ ਉਹ ਸ਼ਲੋਕ ਦਿੰਦੇ ਧਰਮ ਫੁੱਲ ਫਲ ਗਿਆਨ ਪੱਤਰ ਰਸ ਭਰੀਆ ਅੰਮ੍ਰਿਤ ਦੀ ਬਾੜੀ ਹੈ ਰੇਤਨ ਹਰ ਪੂਰੇ ਕਲਿਆ ਜਾਣੀ-ਜਾਣੀ ਦੇ ਰਾਜਾ ਰਾਮ ਕੀ ਕਹਾੜੀ ਪੁੱਤਰ ਜੋਤ ਗਿਆਨ ਪ੍ਰਗਾਸਾ ਕਿ ਗੁਰਮੁਖ ਵਿਰਲੇ ਜਾਣੀ ਇਹ ਗੁਰਮੁਖ ਵਿਰਲੇ ਜਾਣੀ ਸਾਹ ਜਦੋਂ ਤੋਂ ਮੈਂ ਜਾਣ ਲੈਂਦਾ ਉਹ ਵਿਰਲਿਆਂ ਚੋਂ ਇਹ ਜਿਖੌਣੇ ਵਿਦਵਾਨ ਵਿਰਲਿਆਂ ਚੋਂ ਤਾਂ ਕੋਈ ਵਿਰਲੇ ਨਹੀਂ ਜਾਣੀ ਇਹ ਚੱਖ ਮਾਰਦੇ ਰਿਹਾ ਮਾਰੀ ਜਾਂ ਫਰਕ ਪੈਂਦਾ ਗਰਾਉਂਡ ਕੀ ਆ ਗੁਰਬਾਣੀ ਜੀ ਬਿਲਕੁਲ ਹੋਰ ਕਈ ਸ਼ਬਦ ਨੇ ਰੁੱਖ ਦੇ ਹੁੰਦਾ ਯਾਦ ਆਏ ਕੋਈ ਤਾਂ ਉੱਤੇ ਉਹਨਾਂ ਨੇ ਦਿੱਤੇ ਆ ਜੀ ਇੱਕ ਦੋ ਕਵੀਰ ਤਰਵਰ ਰੂਪੀ RAM ਹੈ बैराग। ਰੂਪੀ ਬੈਰਾਗ ਉਹ ਤੇ ਬੈਰਾਗ ਦਾ ਫਲ ਉਹ ਬੋਧ ਦਾ ਫਲ ਕਹਿੰਦੇ ਹਾਂਜੀ ਇਹ ਬੈਰਾਗ ਦਾ ਫਲ ਹੈ ਤਾਂ ਬੋਧ ਦਾ ਫਲ ਕਿੱਥੋਂ ਆ ਗਿਆ ਫਿਰ ਤੇ ਉਹ ਕਹਿੰਦੇ ਗੁਰਬਾਣੀ ਵਿੱਚ ਤਰਵਰ ਕਲੋ ਜੋ ਮਰਜੀ ਕਹੀ ਜਾਂ। ਠੀਕ ਹੈ ਜੀ ਕਹਿੰਦਾ ਭਾਬੀ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਦੇ ਅਰਥ ਕੀ ਆ। ਆਹ ਨਾਲ ਕੁਝ ਵੀ ਨਹੀਂ ਆਇਆ। ਤੁਸੀਂ ਇਹ ਜਿਉਂ ਨਹੀਂ ਕਹਿੰਦੇ ਕਿ ਵੀ ਨਹੀਂ ਸਭ ਚਾਇਆ ਉਹਨੂੰ। ਠੀਕ ਹੈ ਜੀ। ਫੌੜੀ ਆਪੇ ਧਰਤੀ ਆਪ ਹੈ ਰਾਹਕ। ਆਪ ਜਮਾਏ ਪੀਸਾ ਵੈ। ਦੇ ਪਰੋਸੈ। ਆਪੇ ਹੀ ਬਹਿ ਖਾਵੈ ਰਾਈ ਮੁਸਾਫਰ ਵੀ ਆਪ ਹੈ ਧਰਤੀ ਵੀ ਆਪ ਹੈ ਧਰਤੀ ਹਿਰਦਾ ਅੱਛਾ ਜੀ ਧਰਤੀ ਤਾਂ ਹਿਰਦਾ ਹੈ ਹਾਂ ਹਾਂ ਰਾਖਾ ਕੌਣ ਹੈ ਜੀ ਅਨਾ ਦੇ ਮੁਸਾਫਰ ਹੈ ਜੇ ਆਪ ਮੁਸਾਫਰ ਆਪੇ ਹੈ ਰਾਖ ਆਪ ਜਮਾਏ ਪਿਸਾ ਵੈ ਆਪਣੇ ਆਪ ਨੂੰ ਆਪ ਪਹਿਨਾ ਕਰਦਾ ਜਿਵੇਂ ਜੇ ਜਬ ਜੰਦਾ ਹੈ ਜੇ ਜਬ ਜੰਦਾ ਨਾ ਇੱਥੇ ਧਰਤੀ ਦੇ ਨਾਲ ਇੱਕ ਹੋ ਕੇ ਹਾਂਜੀ ਫਿਰ ਪੀਸ ਆਏ ਫਿਰ ਆਪਣੇ ਆਪ ਨੂੰ ਬ੍ਰੀਕੀ ਨਾਲ ਸਮਝਦਾ ਬ੍ਰੀਕੀ ਨਾਲ ਪੀਸ ਧਰਤੀ ਥੋੜੀ ਬੀਸਲੀ ਆਪਣੇ ਆਪ ਨੂੰ ਪੀਸਾ ਧੱਦਾ ਤੂੜਪੂਦੀ ਤੇਰੀ ਜਰੂਰ ਤਨ ਦੇ ਉਤੇ ਰੁਚਰੇ ਜੇ ਰੁਚਰੇ ਕਿਆ ਬਦੂ ਫਿਰ ਬ੍ਰੀਕੀ ਨਾਲ ਸਮਝਦਾ ਹੈ ਇਹ ਬਰੀਕੀ ਨਾਲ ਸੁਭਿਦ ਲੈਂਦਾ ਤੇ ਗਿਆਨ ਦੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਆਪ ਪਕਾਵੈ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ ਹਾਲੇ ਵਿੱਚ ਤਾਂ ਵਸਤੂ ਕੋਈ ਪਰੋਸਦਾ ਆਪੇ ਪਕਾਉਂਦਾ ਗਿਆਨ ਨੂੰ ਬਹਿਣਾ ਸੋਧਤ ਸੋਧਤ ਸੋਧਤ ਸੀਧਿਆ ਸੁਣ ਜਾਂਦਾ ਫੇ ਅੱਛਾ ਜੀ ਯਾਨੂ ਪਕਾਇਆ ਤੇਲਾਂ ਕੱਚਾ ਹੁੰਦਾ ਪਹਿਲੂ ਨਹੀਂ ਸਮਝਦਾ ਚੌਦਾਂ ਸਾਰੀ ਗੱਲ ਹੋੜੀ ਹੋੜੀ ਸਭ ਚੌਂਦੀ ਹੈ ਪਕਾਏ ਪਕਾ ਦੇ ਆ ਪਾण्डे ਸ਼ਬਦ ਨੇ ਜਿਹੜੇ ਅੱਖਰ ਨੂੰ ਪਾੜਦੇ ਨੇ ਅੱਛਾ ਜੀ ਆ ਗੁਰੂ ਗ੍ਰੰਥ ਸਾਹਿਬ ਨੂੰ ਤਾਲੀ ਥਾੜ ਕੇ ਹੈ ਆੜੇ ਵਿੱਚ ਤਿੰਨ ਵਸਤੂ ਪਈਓ ਇਹ ਅੱਖਰ ਪਾੜਦੇ ਨੇ ਜਿਹਨਾਂ ਬਾਅਦ ਤੋਂ ਦੇ ਵਿੱਚ ਪਾੜਿਆਂ ਦੇ ਥਾਲੇ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋumbreਤਾਂ ਫਿਆਰ ਦਾ ਪਈਓ ਜਿਸ ਦਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਕੁਝ ਕੇਤਸ ਕਾ ਹੋਏ ਉਧਾਰੋ ਗੱਲ ਸਹੀ ਹੋਈ ਹੈ ਠੀਕ ਹੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪੇ ਹੀ ਬਹਿ ਖਾਵੇ ਖਾਊਗਾ ਆਪੇ ਹੀ ਖਾਊਗਾ ਆਤਮਾ ਦੀ ਗੱਲ ਠੀਕ ਹੈ ਜੀ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਜੀ ਹਾਂ ਰਿਪਗਿਆ ਦੀ ਗਿਆਨ ਠੀਕ ਹੈ ਜੀ ਆਪੇ ਜਲ ਆਪੇ ਦੇ ਛਿੰਗਾ ਆਪੇ ਚੁੱਲੀ ਭਰਾਵੇ ਆਪੇ ਜਲ ਆਪੇ ਦੇ ਆਪੇ ਚੁੱਲੀ ਤੇ ਆਵਾ ਲਪੇਟਦੇ ਹੁੰਦੇ ਅੱਛਾ ਉਹ ਗੜੀ ਨੇ ਬੰਨਦੇ ਹਾਂਜੀ ਹਾਂਜੀ ਉਹ ਬਤੇ ਜਿਹੜੇ ਨੂੰ ਬੰਨੜੇ ਜਿਵੇਂ ਹੈ ਉਹ ਉਹ ਵੀ ਕਹਿੰਦੇ ਜਿਹਦੇ ਪਾਣੀ ਆ ਪਾਉਂਦੇ ਨੇ ਉਹਦੇ ਨਾਲ ਪਾਉਂਦੇ ਨੇ ਕੌਟੇ ਜਿਹਨਾਂ ਉਹ ਲਗਾਉਂਦਾ ਠਿਕੀ ਜੀ ਅੱਛਾ ਜੀ ਆਪੇ ਜਾਲ ਆਪੇ ਹੈ ਕਿਦਾਂ ਆਪੇ ਚੂਲੀ ਭਰਾਵਾ ਆਪੇ ਤੇ ਸਟੈਸ ਕਰਦਾ ਕਿ ਨੂੰ ਚੁਲੀ ਭਰੋਂਗਾ ਬੰਦਨ ਦੀ ਜਦ ਕਰਦਾ ਖਿਰਤਾਂ ਲੈਂਦਾ ਰਾਖੀ ਕਰਨ ਦੀ ਰਾਖਾ ਆ ਬੰਦ ਹੈ ਜਦੋਂ ਮਨ ਤੋਂ ਬਚਾਉਂਦੀ ਪ੍ਰੈਕਟੀ ਨਹੀਂ ਲੈਂਦਾ ਲੋ ਫਿਰ ਉਹ ਠੀਕ ਹੈ ਜੀ ਇਹ ਬਚਾਉਣ ਦੀ ਗਰੰਟੀ ਦੋਤੇ ਲੈਂਦਾ ਬੰਦੂ ਤਾਂ ਬਚਾਉਣ ਦੀ ਗਰੰਟੀ ਆਪ ਲੈਂਦਾ ਉਹ ਫਿਰ ਕਹਿੰਦਾ ਠੀਕ ਹੈ ਜੀ ਆਪੇ ਸੰਗਤ ਸੱਦ ਬਹਾਲ ਹੈ ਆਪੇ ਵਿਦਾ ਕਰਾਵੇ ਆਪੇ ਸੰਭ ਤੇ ਸਰਦ ਬਹਾਲਾ ਆਪੇ ਵਿਦਾ ਕਰਾਵੇ ਆਪੇ ਆ ਦੁਨੀਆ ਪੈ ਗਿਆ ਕਰੁੰਦਾ ਆਪੇ ਇੱਥੋਂ ਲੈ ਜਾਂਦਾ ਠੀਕ ਹੈ ਜਿਸ ਨੂੰ ਕਿਰਪਾਲ ਹੋਵੇ ਆਪੇ ਤਿਸ ਨੂੰ ਕਿਰਪਾ ਹੋ ਜਾਂਦੀ ਹੁਕਮ ਮਨਾ ਲੈਂਦਾ ਪਰ ਦੀ ਕਿਰਪਾ ਜਿੱਤੇ ਤੇ ਜਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਉਹ ਹੁਕਮ ਮੰਨਾਲੰਦ ਇਤਬਲੰਦ ਇੱਥੇ ਹਰ ਪਰਮੇਸ਼ਰ ਵਾਸਤੇ ਆਇਆ ਜੀ ਜਿਸ ਨੂੰ ਕਿਰਪਾਲ ਹੋ ਗਏ ਹਰ ਆਪੇ ਤਿਸ ਨੂੰ ਹੁਕਮ ਮੰਨਾਵੇ ਕਿਰਪਾਲ ਹੋ ਗਏ ਆਇਆ ਪਰ ਇਹਨੇ ਪਰਮੇਸ਼ਰ ਵਾਸਤੇ ਵੀ ਨਹੀਂ ਆਇਆ ਹਰ ਅਸਲ ਵਿੱਚ ਹਾਰ ਜਿਹੜਾ ਹੈ ਇਹ ਹਰ ਦੀ ਇਹਦੀ ੱਿੱਲ ਕਰਕੇ ਹੀ ਵੰਗ ਹਰ ਆਪ ਸਹਿਬਤ ਕਮਜ਼ੋਰੀ ਹਰ ਦੀ ਜਿਆਦਾ ਹਰ ਸਿੱਕਟ ਹੋ ਜਾਂਦਾ ਹੈ ਗੋਲਦੀ ਗੱਲ ਬੁੱਝਣੀ ਹੋਈ ਸੀ ਕਿ ਆਪਾ ਸਿੱਕਟ ਹੋ ਜੀ ਇਹ ਬੁੱਝਣੀ ਗੱਲ ਬੁੱਝਣੀ ਹੋਈ ਸੀ ਮੈਂ ਤਾਂ ਕਹਿਣਾ ਕੋਈ ਗੁਨਾਹੂ ਭਾਈ ਕਰਪਾ ਸੋਸ ਤੇ ਖਲਾਫ ਸਟ੍ਰਿਕਟ ਹੋ ਜਾਣਾ ਪੂਰਾ ਇਹ ਕਾਹਦੇ ਕਹਿਆ ਮੈਂ ਮਰਜੂਗਾ ਸ਼ਰਾਬ ਵੀ ਪੀਦਾ ਡਾਕਟਰ ਕਹਿੰਦਾ ਵੀ ਇਹਨੂੰ ਸ਼ਰਾਬ ਫਲਾ ਦੋ ਇਹ ਉਹ ਕਹਿੰਦਾ ਮੈਂ ਮਰਨਾ ਮਰਜੂਰ ਆ ਮੈਂ ਮੇਰੇ ਮੂੰਹ ਤੇ ਨਾ ਬਾਜੀ ਧੁਮਕਾ ਕਿਸ਼ੋ ਕਰ ਮੈਂ ਡਾਕਟਰ ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ